सवैये महल्ले पहले ਕੇ एक ओंकार सतगुरु ਗੁਰ इक मन पुरुष तिहाए वरदाता संत सहार ਸਦਾ विख्याता हां जी एक बड़े पुरख ते आए बड़ दाता ठीक है, है। जी बड़ा <laughs> ਹਾਂਜੀ ਕੋਲੋਂ ਇੱਕ ਬੰਦ ਹੋ ਗਏ ਉਹ ਜੇ ਧਿਆਨ ਰੱਖਣਾ ਚਾਹੀਦਾ ਅੱਛਾ ਜੀ ਹਾਂ ਜਿਹੜਾ ਇੱਕ ਦਾ ਹੂੰ ਹੂੰ ਜਿਆਦਾ ਕੁਝ ਕਰਦਾ ਹੈ ਉਹਨੂੰ ਸਰਫਰ ਕਹਿੰਦੇ ਨੇ ਜਦ ਬੋਲਦਾ ਨਾ ਇੱਛਾ ਪੈਦਾ ਹੁੰਦੀ ਇੱਕ ਦੀ ਜਿਹੜੀ ਇੱਛਾ ਹੈ ਹੂੰ ਹੂੰ ਉਹਦੇ ਪੈਦਾ ਹੁੰਦੀ ਹੈ ਅੱਛਾ ਜੀ ਇਸ ਤੀਦਾ ਪੈਦਾ ਹੋਣਾ ਜਿਹੜਾ ਨਾਮ ਇਸ ਦੀ ਪਾਲਣਾ ਕਰਨਾ ਉਹਦੇ ਹੁਕਮ ਦੇ ਵਿੱਚ ਹੈ ਇਹਨੇ ਗੱਲਾਂ ਦੇ ਚਾਹਾਂ ਉਰਗ ਵਗ ਜਾਂਦਾ ਹ ਹੇਰ ਉਸ ਸਮਾਧਨ ਡੇ ਜਾਂਦਾ ਹੈ ਅੱਛਾ ਜੀ ਜੇ ਸਤੁ ਸਮਾਧਨ ਨਾ ਫਿਰ ਪਰ ਕੰਮ ਜੋਤਰਾ ਹੈ ਨਹੀਂ ਹੈ ਪਰ ਉਹ ਇੱਛਾ ਕੋਈ ਤੁਸਕਲ ਅੱਛਾ ਜੀ ਕਾਲੀ ਦੇ ਹੋਂਦ ਬਹੁਤ ਹ ਹ ਸਰਕਾਰ ਇਹ ਰਿਸ਼ਤੇ ਇਹ ਹਰ ਪਾਣੀ ਦੇ ਵਿੱਚ ਜਿੱਥੇ ਕੋਈ ਚੀਜ਼ ਸਦਰੀ ਉੱਥੇ ਕੋਈ ਰਹੂਗੀ ਹੂੰ ਹੂੰ ਤੋਂ ਬਿਜੇ ਲਹਿਰਾ ਚੱਲਦਾ ਹਾਂਜੀ ਆਗੇ ਪਿੱਛੇ ਹੁੰਦੀ ਹੈ ਜੀ ਸਸ ਠੀਕ ਹੈ ਜੀ ਨਾਲ ਵੀ ਵੀ ਆ ਜਾਂਦੇ ਹੈ ਹੂੰ ਹੂੰ ਹੈ ਨਾ ਸਮੁੰਦਰ ਦੇ ਵਿੱਚ ਜਿਵੇਂ ਹਾਂਜੀ ਨਾਲ ਐਵੇਂ ਸਾਡੇ ਉੱਤੇ ਮੂਵਮੈਂਟ ਹੁੰਦੀ ਹੈ ਜਦੋਂ ਇੱਛਾ ਪੈਦਾ ਹੁੰਦੀ ਹੈ ਸਾਡੇ ਅੰਦਰ ਉੰਝੇ ਦਾ ਹੈਗਾ ਹਾਂਜੀ ਮਨ ਵਿੱਚ 600 ਰੁਪਏ ਦਾ ਮਨ ਚਲਾਇਆ ਮਨ ਹੋ ਜਾਂਦਾ ਹੂੰ ਪੂਰੇ ਦਾ ਮਨ ਚਲਾਇਆ ਮਨ ਉਹ ਫਿਰ ਫੁਰਖਾ ਕਰਤਾ ਫੁਰਖਾ ਅੱਛਾ ਜੀ ਕਰਤਾ ਫੁਰਖੇ ਲੱਗਿਆ ਹੋਇਆ ਜਦੋਂ ਸਾਡੇ ਕੋਲ ਗੁਰਬਾਨੀ ਹੈ ਹੂੰ ਸਾਰੇ ਤੁਸ ਸਭਤ ਸੂਰਤ ਨੇ ਪਾਸਰਲ ਬੀਚੋ ਨਸਾਰਿਆ ਦੇ ਚਾਵਿਤ ਹੈ ਠੀਕ ਹੈ ਉਹ ਸਿੱਖ ਕੁਟ ਚਾਹਾਰਾਂ ਦੇ ਉਹਦੇ ਨਾਲ ਸਿੱਤੀ ਸਖੌਂਦੀ ਆਉਂਦੇ ਨੇ ਸਿੱਤੀ ਦਾ ਸੁਭਾਰ ਉਹ ਕਹਿੰਦੇ ਨੇ ਸਿੱਤੀ ਲਿਪੜਣਾ ਹੁੰਦੀ ਹੈ ਹੂੰ ਹੂੰ ਕਿੰਨਾ ਦਾ ਸਰਤਾ ਫਰਕ ਲੱਗਿਆ ਹੈ ਠੀਕ ਉਹਦਾ ਇਤੋ ਹੀ ਹੈ ਸਭ ਦਾ ਪਾਣਾ ਆਪਣਾ ਆਪਣਾ ਪਰ ਹੈ ਕੋਈ ਹੂੰ ਹੂੰ ਨਾ ਇਹ ਕੌਣ 11 ਆਦਮੀ ਆਹ ਜੇ ਉਹ ਸਰਸੋਰ ਵਾਲੇ ਵਿੱਚ ਸਰਸੋਰ ਸੁਣਿਆ ਕੋਈ ਉਹਦੀ ਸੁਰ ਪਾਦਣਾ ਹੋਵੇ ਜੇ ਤੁਸੁਰ ਜੇ ਤੁ ਪਾਦਣਾ ਹੋਵੇ ਨਹੀਂ ਪਾਸ ਵੀ ਇਹ ਆ ਜਾਂਦੀ ਆ ਠੀਕ ਹੈ ਦੇਖੋ ਸੁਰ ਹੋ ਸਾਰੇ ਦਾ ਪਾਉ ਕਾ ਰਹੇ ਹਾਂਜੀ ਉਹ ਸਹੀ ਪਰ ਕਿ ਤੇ ਸ਼ਾਬਦ ਗੁਰੂ ਦੇ ਚੇੇ ਹੋ ਗਿਆ ਦਾ ਧਿਆਨ ਦੇਣਾ ਚਾਹੀਦਾ ਅੱਛਾ ਸੁਰ ਤੇ ਸ਼ਬਦਾਂ ਤੇ ਤੁਸ ਦਾ ਮਤਲਬ ਹੋ ਰਿਹਾ ਅੱਛਾ ਜੀ ਉਸ ਵਾਸਤੇ ਚਾਹ ਦੇ ਘਰੂਚੇ ਸਤਿਗੁਰੂ ਦੇ ਸੇਤੋ ਕਿ ਧਿਆਨ ਤਰਨਾ ਪੈਂਦਾ ਧਿਆਨ ਤਰਨਣਾ ਜਾਈਦਾ ਅੱਛਾ ਜੀ ਹਾਂ ਜੀ ਸੰਤ ਸਹਾਰ ਸਦਾ ਵਿਖਿਆਤਾ ਸੰਸਤਨ ਸਹਾਰਾ ਸੁਤਨ ਨੂੰ ਹੋਤੈ ਸਹਾਰਾ ਵਰਦਾ ਸੰਤਾਂ ਦੇ ਅੱਧਾ ਜਿਹੜਾ ਟਿਕਾਉ ਹੁੰਦਾ ਹ ਹ ਸੰਤਾਂ ਦੇ ਤੇ ਹੈ ਉਹ ਇਹ ਸਦਾ ਤੋਂ ਗਲ ਵਿਖਿਆਤ ਰਹੀ ਹੈ ادا تو یہ گل وخیات ہے ہمیشہ ہی لوگ یہ کرتے رہیں گے اور اس بات کا کہ وہ سلطانہ سہار ہوتا ہے ٹھیک ہے گل صاحب نے بتایا ہاں ہمم تو بھائیوں سوکھ پر سے پرور نواں تھا جتھے جہاں سے وہ سو رہا ہوں آرال ہے سدر رپورٹ دے کے رہا ਸੋ ਕਮਨੈ ਸੋ ਕਾ ਬ੍ਰੋਤ ਪ੍ਰਭ ਨਾਮ ਹਾਂ ਜੀ ਗੁਰੂਤ ਪ੍ਰਭ ਨਾਮ ਹੈ ਸੁਖ ਦਾ ਹੈ ਤ ਭਗਤਾਂ ਵਾਸਤੇ ਪਰਜਨਾਂ ਦੇ ਭਾਰ ਉਹ ਦਿਨ ਦੀ ਤੇਗ ਭਗਤ ਦੀ ਤੇਗ ਤੂੰ ਹਾਂ ਇਹ ਸਦਾ ਦਾ ਵਾਲ ਵਿਖਿਆਤ ਰਹੀ ਠੀਕ ਹੈ ਜੀ ਹਾਂ ਪਾਸ ਚਰਨ ਲੈ ਬਸਾਵੋ ਤਾਂ ਪਰਮ ਗੁਰੂ ਨਾਨਕ ਗੁਣ ਗਾਉ ਆਪਣੇ ਗੱਲ ਕਰਦੇ ਵੇ ਉਹਦੇ ਚੰਦ ਸਿੱਕੇ ਮੈਂ ਆਪਣੇ ਹਿਰਦੇ ਚ ਬਸਾਰੇ ਹਾਂ ਪਹਿਲਾਂ ਤਾਂ ਆਇਆ ਗੁਣ ਗਾ ਰਹੇ ਹਾਂ ਮੈਂ ਬਲਾਇਆ ਬੋਲਦਾ ਜਪ ਨਾਲ ਜੁੜ ਕੇ ਬੋਲਦਾ ਹੂੰ ਉਰਦੇ ਚਾਰਨ ਲੈ ਕੇ ਉਹਦੇ ਕੋਲ ਲੈ ਕੇ ਮੈਂ ਆਪਣੀ ਹਰਦਾਇਤਾਂ ਨਾਲ ਕਿਤੇ ਸਹਿਰ ਮਾ ਉਹਦੇ ਕਿਸ ਤਰੀਕਰਣ ਤੋਂ ਹੈ ਇਹ ਇਹ ਬੀ ਨਾਮ ਖਰੀਦਾਰੇ ਨੇ ਅੱਛਾ ਪਰਮ ਗੁਰੂ ਨਾਨਕ ਗੁਰ ਗਾਉ ਉਹ ਬਨਾਰਸ ਦੇ ਵੀ ਉਹ ਹੀ ਸੀ ਹਮ ਗੁਰੂ ਤੇ ਪਰਮ ਗੁਰੂ ਦੂਜੇ ਨਾ ਗੁਰੂ ਖਿਆ ਉਹਦੇ अच्छा जी। ਸਾਡਾ ਵੀ ਗੁਰੂ ਵੀ ਚਾਹੁੰਦਾ ਰਹੀ ਹੈ। ਠੀਕ ਹੈ ਜੀ। ਤੇ ਜਿਹੜਾ ਇਹਦਾ ਕੇ ਪੜਨਾ ਹੈ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਵੀ ਜਿਹੜੇ ਪਰਮ ਗੁਰੂ ਗੁਣ ਗਾਏ ਆ ਉਹੀ ਮੈਂ ਗਾ ਰਿਹਾ ਠੀਕ ਹੈ ਜੇ ਗੁਰੂ ਦੇ ਨਾਨਕ ਦੇ ਗੁਣ ਗਾਏ ਨੇ ਪਰਮ ਗੁਰੂ ਹੈ ਗੁਰੂ ਠੀਕ ਹੈ ਜੀ। ਤੇ ਪਰਮ ਗੁਰੂ ਹੈ ਸਭ ਕਹਰਾ ਹੋ ਹਾਂਜੀ ਪਰ ਜਿਹੜੇ ਮੈਨੂੰ ਲੱਗਦਾ ਆਮ ਪ੍ਰਚਲਿਤ ਅਰਥ ਹੈ ਉਹ ਵੀ ਤੋਲਟੇ ਕਿ ਉਹਨਾਂ ਨੂੰ ਇਹ ਲੱਗਦਾ ਗੁਰੂ ਨਾਨਕ ਦੇ ਗੁਣ ਗਾ ਰਹੇ ਆ ਨਾਨਕ ਨੂੰ ਗੁਰੂ ਕਹਿੰਦਾ ਨਰਕੇ ਨਾਨਕ ਸਾਧੂ ਜੀ ਗੱਲ ਠੀਕ ਹੈ ਜੀ ਕਹਾਣੀ ਦੀਆਂ ਪੁਕਤੀਆਂ ਹੋ ਜਾਂਦੀ ਹੈ ਜਿਹਦੇ ਗੁਣ ਐ ਦਾਰ ਰਹੇ ਨੇ ਅੱਛਾ ਜੀ ਤਾਂ ਕੋਲ ਮੈਨੂੰ ਆ ਰਿਹਾ ਉਗਗਲੀਆਂ ਤੋਂ ਪਿਆਰ ਦੀ ਗੱਲ ਸਪੈਰਸ਼ ਹੋ ਜਾਂਦੀ ਹੈ ਠੀਕ ਹੈ ਜੀ ਅਗਲੀਆਂ ਤੋਂ ਪਿਆਰ ਨਾਲ ਹੋ ਲਿਜੀਓ ਠੀਕ ਹੈ ਜੀ ਹਾਂ ਜੀ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਸ਼ਬਦ ਸਰੀ ਆਹ ਦੇਖੋ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਪਰਮ ਗੁਰੂ ਕੋਮੈ ਸੁਖ ਸਾਗਰ ਗੁਰੂ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸਾਂ ਨੇ ਮੈਂ ਜਿਹਦੇ ਵਿੱਚ ਅਸੀਂ ਸਮਾਉਣਾ ਉਹ ਸੁਖਸੰਗ ਹੈ ਠੀਕ ਹੈ ਜੀ ਉਹ ਕਰਦੇ ਆ ਹੂੰ ਹੂੰ ਕੋਈ ਸ਼ਬਦ ਮੈਂ ਨਾ ਬੰਨਣਾ ਚਾਹ ਰਿਹਾ ਬਾਣੀ ਹੈ ਉਹ ਜਿਹਨੂੰ ਕਹਿੰਦੇ ਕੋ ਲਾਂ ਤੁਰਕੀ ਬਾਣੀ ਆਈ ਤੇਨ ਅਗਲੀ ਚੇਤ ਤੋਂ ਸਾਰੀ ਬਿਟ ਤਾਂ ਸੁੱਖ ਹੈ ਹੋਇਆ ਆਪੋਂ ਕੋਣ ਪਰਮ ਗੁਰੂ ਸੁਖ ਸਾਗਰ ਦੁਰਤਨਵਾਦ ਦੁਰਤ ਨਹੀਂ ਹੈ ਜਿਹੜੀ ਮਨ ਦੀ ਇੱਛਾ ਹੈ ਮਨ ਵਿਰੋਧ ਕਰਦਾ ਹੈ ਹੋਬ ਨਾ ਉਹ ਕਦਮ ਹੋਗੀ ਚਲ ਹੂੰ ਹੂੰ ਉਸ ਦੀ ਜਿਹੜੀ ਆਪਣਾ ਭਾਣਾ ਉਹ ਆਪਣਾ ਭਾਣਾ ਕਦਮ ਆਪਣਾ ਭਾਣਾ ਮਨ ਪਰ ਦੇ ਆਪਣਾ ਭਾਣਾ ਛੱਡ ਤਾ ਉਹਨਾਂ ਉੱਰ ਗਿਆ ਦੁਆ ਦੀ ਰਹਾ ਦੁਆ ਦੀ ਰਹਾ ਇੱਕ ਹੋ ਗਿਆ ਇੱਕ ਬੰਨ ਹੋ ਗਿਆ ਦੁਆ ਮੰਗੀ ਰਹਾ ਐ ਕਹਿ ਲੋ ਦੁਆ ਮੰਗ ਨਹੀਂ ਰਿਹਾ ਮਾਇਆ ਜੀ ਚੱਕਰਾਂ ਬੰਨ ਨਹੀਂ ਰਿਹਾ ਮਾਇਆ ਦੀ ਚੈਨ ਖੰਗੜਾ ਬੰਨ ਨਹੀਂ ਰਿਹਾ ਠੀਕ ਹੈ ਸ਼ਬਦ ਸਰੇ ਹਮ ਸ਼ਬਦ ਹੈ ਉਹ ਦੁਰਤਨ ਵਾਲਾ ਸ਼ਬਦ ਸਰੇ ਹਮ ਸ਼ਬਦ ਹੈ ਪਰ ਨਾ ਸੁਣਨ ਵਾਲਾ ਹਮ ਹਮ ਸੁਣਨ ਵਾਲਾ ਨਹੀਂ ਹੈ ਕਰਨਾਵਾਂ ਵਾਲੇ ਸ਼ਬਦ ਵਿੱਚ ਸਾਰ ਲੁਪਤ ਆ ਜਾਂਦਾ ਹੈ। ਹਨਾ ਵਾਲਾ ਸ਼ਬਦ ਗੁਰਬਾਣੀ ਹੈ ਸੁਣਨਾ ਇਹਨੂੰ ਸੁਣ ਕੇ ਸਫੇ ਦਾ ਪੈਂਦਾ ਹੈ। ਇਹ ਜੋ ਸਮਝੇ ਤੋਂ ਤਾਂ ਸਾਰ ਮਿਲਦਾ ਲੱਸੀ ਵੀ ਹੁੰਦੀ ਹੈ ਮੱਖਣ ਵੀ ਹੁੰਦਾ ਔਰ ਡਰਾ ਮੱਖਣ ਹੁੰਦਾ ਲੱਸੀ ਨਹੀਂ ਆਉਦੀ ਉਹ। ਠੀਕ ਧੀਰ ਮਤ ਸਾਗਰ योगी जंगम ध्यानतरे ਹੌਣ ਗੁਲਦੇ ਰਹੇ ਨੇ ਗੁਰੂ ਤੀਰ ਮੱਤ ਵਾਲੇ ਧੀਰਜ ਅਡੋਲ ਹਸਤਾ ਵਾਲੇ ਆਦਿ ਵੀ ਹੂੰ ਹੂੰ ਪਰ ਜਿਹੜਾ ਖੜੇ ਕਬਰ ਉਹਦੇ ਦੀ ਤੋਂ ਵੀ ਕਬਰ ਹੁੰਦਾ ਦੁੱਬੀ ਤੀਰ ਮੱਤ ਸਾਗਰ ਸਾਗਰਗਦੀ ਮੱਤ ਵਾਲੇ ਅੱਛਾ ਹੋ ਰਹੇ ਨੇ ਉਹ ਔਰ ਕੋ ਨੱਲੂ ਬੰਦੀ ਉਹ ਨਹੀਂ ਜਾ ਸਕਦਾ ਹਲੂ ਨਾ ਕਿਸੇ ਦਾਇਆ ਹੂੰ ਹੂੰ ਤੇ ਭਈ ਟੀਰ ਮੱਤ ਦੇ ਬਿਨਾ ਕੋਈ ਨਹੀਂ ਜਾ ਸਕਦਾ ਠੀਕ ਹੈ ਕਿਸੇ ਦਾਇਆ ਹੈ ਹੂੰ ਐਡੀ ਮੱਤ ਚਾਹੀਦੀ ਹੈ ਗਾਉਣ ਵਾਸਤੇ ਠੀਕ ਵੀ ਮੇਰੀ ਮੱਤ ਐਡੀ ਹੈ ਹੂੰ ਹੂੰ ਆਪਣੇ ਗੱਲ ਕਰ ਰਹੇ ਮੇਰੀ ਮੱਤ ਆਪ ਗਾ ਰਿਹਾ ਹੂੰ ਹੂੰ ਇਹ ਸਾਰਾ ਵੀ ਇਹਨਾਂ ਦਾਾਇਆ ਉਹ ਐਡੀ ਮੱਤ ਇਸ ਕਰਦੇ ਕੋਈ ਮਰਦਾ ਸਾਰਿਆਂ ਦੀ ਇਹਨਾਂ ਦੀ ਗੁਰਬਾਨੀ ਹੈ ਹਾਂ ਹਾਂ ਤਾਂ ਹੱਟ ਨਹੀਂ ਬਾਨੇ ਬਰਾਬਰ ਆਗੇ ਗੋਣਾਂ ਕਰਦੇ ਠੀਕ ਹੈ ਜੀ ਆ ਗੱਲ ਦੱਸਿਓ ਨੇ ਉਹਦਾ ਕਹਨ ਜਿਵੇਂ ਧੀਰ ਤੀਰ ਸਾਧਨ ਮਤ ਵਾਲੇ ਜਾ ਸਕਦੇ ਨੇ ਕਹਿੰਦੇ ਰਹੇ ਨੇ ਜੋਗੀ ਜੰਗਮ ਅਰੇ ਅਰੇ ਮਤ ਨਹੀਂ ਜੋਗੀ ਜੰਗਮ ਧਿਆਨ ਤਰੇ ਜੋਗੀ ਜੰਗਮ ਭਾਇਆ ਧਿਆਨ ਤਰੇ ਰਹੇ ਗਾਇਆ ਕਿਸੇ ਨੇ ਜੋਗੀ ਜੰਗਮ ਬਲੇ ਅੱਛਾ ਤਾਂ ਅਜੋ ਤੇ ਅੰਤਰ ਦੇ ਜਿਹਨੇ ਸਮਝ ਨਹੀਂ ਉਹਨਾਂ ਨੂੰ ਆਈ ਅੱਛਾ ਜੀ ਤਾਂ ਜੇ ਸ਼ਬਦਾਈ ਤਾਂ ਸਰੇ ਪਰੋ ਸਰੀਰ ਦੇ ਨਾਲ ਜੁੜੇ ਹੋਏ ਨੇ ਸਰੀਰ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਸ਼ਬਦ ਸਰੀਰ ਤੇ ਹੀ ਹੁੰਦਾ ਉਹ ਤਮਾਦ ਕੇ ਬੈਠ ਕੇ ਧਿਆਨ ਦਿੰਦੇ ਨੇ ਜੋਗੀ ਦਿਲ ਕੇ ਬੈਠ ਕੇ ਤੇ ਸਰੀਰ ਤਮਾਦ ਕੇ ਬੈਠ ਕੇ ਧਿਆਨ ਸਰੀਰ ਦਾ ਠੀਕ ਹੈ ਜੀ। ਇਹ ਸਭ ਲੋਕਾਂ ਵਿੱਚ ਹੁੰਦਾ ਬੰਦੇ ਅੰਦਰ ਹੁੰਦਾ। ਹੂੰ ਹੂੰ। ਢਿਕੋਣੀ ਢਿਕੋਣੀ ਜਿ ਬੈਠ ਕੇ ਬੰਦਾ ਆਪ ਸੁੱਚਦਾ। ਹੂੰ ਹੂੰ। ਢਿਕੋਣੀ ਦਾ ਬੰਦੇ ਸੁਲਦਾ ਰਹਿਣਾ। ਸੁਲਦਾ ਗਾਉਣਾ। ਬੰਨ ਗੁੱਦੀ ਹੋਈ ਸੁਲਦਾ। ਹੂੰ ਹੂੰ। ਉੱਤਮ ਹੁੰਦੇ ਬਾਰੇ। ਕਰੀਂ। ਗਾਵਹਿ ਇੰਦਰਦ ਭਗਤ ਪ੍ਰਹਲਾਦਿਕ ਆਤਮ ਰਸ ਜਿਨ ਜਾਣਿਓ। ਹਲਵੀ ਦਾ ਰਹੇ ਜੀ ਹੂੰ ਹੂੰ ਹੁਲਵੀ ਦਾ ਰਹੇ ਜਦ ਤੱਕ ਆਇਆ ਹੀ ਸੀ ਉਹਨਾਂ ਨੇ ਦਰਾਦ ਹੂੰ ਹੂੰ ਦਰਾਦ ਕਦੇ ਪਰ ਅੱਜ ਵੀ ਘਾਰ ਰਹੇ ਨੇ ਜਿਹੜਾ ਇੱਕ ਵਾਰ ਗਾਉਣ ਲੱਗੇ ਉਹਨੇ ਰਹਿੰਦਾ ਫਿਰ ਉਹ ਹੰਡਦਾ ਦੀ ਭਗਤ ਪਰਲਾ ਪਰਲਾਦ ਭਗਤ ਆਤਮ ਰਖਾ ਦੇ ਗੁਰੂ ਜਿੱਦੜੀ ਨੂੰ ਕਿਹਾ ਇੱਦਰੇ ਦੇ ਉੱਤਮ ਰਾਜਾ ਅੱਛਾ ਜੀ ਜਿਹੜਾ ਸੰਸਾਰ ਦੇ ਵਿੱਚ ਭਗਤ ਹੈ ਜਿਹਨੂੰ ਗੁਰਨਾਮਕਾ ਇਦਸਦੀ ਬਦਵੀ ਦਾ ਇਹ ਗੱਲ ਹੈ ਅਸਲ ਕਿ ਤੇਰੇ ਗੁਰਨਾਮਕਾ ਸਾਰੇ ਭਗਤ ਵੀ ਬੱਟ ਵੀ ਇਦਰੇ ਅੱਛਾ ਜਿਹੜੇ ਸੰਸਾਰ ਦੇ ਰਾਜੇ ਨੂੰ ਹੋਰ ਵੱਡੀ ਆ ਜਾਂਦੀ ਬਲਤੀ असल में राजा कौन है छत्रपति है कौन सरदार से पन्ना का सूर छत्रपति राजा भगत बराबर और कोई असल की बात है छत्रपति है बड़ा है सरदार हो रहा है भी कोई बाकी सब नकली ने ये कह दे ਹਮਮ ਠੀਕ ਹੈ ਜੀ ਇੰਦਰਾਦ ਲਿਖਿਆ ਤਾਂ ਹੀ ਹੈ ਨਾ ਜੀ ਹਾਂ ਭਗਤ ਪ੍ਰਲਾਦਕ ਆਤਮਰਸ ਜਿਨ ਜਾਣਿਓ ਇਹਨਾਂ ਸਾਹਮਣੇ ਆਤਮਰਸ ਪ੍ਰਾਪਤ ਕੀਤਾ ਹੈ ਜੀ ਤਾਂ ਖਾਲੇ ਦੇ ਵਿੱਚ ਉੱਥੇ ਜਨਗੀਆਂ ਲਿਜੋ ਹੈ ਸ਼ਰਾਬੀ ਸ਼ਰਾਬੀ ਕੋ ਮੱਬੀ ਗੱਲ ਨਹੀਂ ਅੱਛਾ ਜੀ ਆਪ ਤਾਂ ਬੜਾ ਅਜੇ ਜਾਣੇ ਹੂੰ ਹੂੰ ਕਬੀ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਹਾਂ ਕਬੀ ਕਲ ਕਹਿੰਦਾ ਹੈ ਕਲ ਹੋਈਦਾ ਹੈ ਮਤਲਬ ਹੈ ਜੋ ਪਿੱਛੇ ਆ ਰਿਹਾ ਹੈ ਜਾਇਆ ਹੋਇਆ ਜੋ ਪਿੱਛੇ ਮਤਲਬ ਹੈ ਗੁਰਸੁਨਾ ਦੇ ਵਿੱਚ ਲਿਖਤਾਂ ਨੇ ਬੇਤ ਤੋਂ ਲੈ ਕੇ ਬਾਅਦ ਦੇ ਵਿੱਚ ਜਿਹੜੀਆਂ ਕਬੀਰ ਦੇ ਬੜੀਆਂ ਨੇ ਉਹ ਪੈਟਰਨ ਤੇ ਉਹੀ ਗੱਲ ਗੁਰਨਾਨ ਦੇ ਆਪਣੇ ਲਫ਼ਜ਼ਾਂ ਚਹੀ ਹੈ ਹੈ ਦੁਰਬਲੀ ਅੱਛਾ ਜੀ ਉਹ ਵਸਤਾਜ ਕਹੀ ਹੈ ਇਹ ਗੱਲ ਉਹੀ ਕਹੀ ਹੈ ਇਹ ਕਹਿਣਾ ਮਤਲਬ ਇਹ ਹੋਇਆ ਕਿ ਗੁਰਦਾਨ ਨੇ ਕੋਈ ਐਸੀ ਗੱਲ ਗਲਤ ਨਹੀਂ ਕਹੀ ਇਹ ਧਰਮ ਪਿੱਛੋਂ ਤੋਂ ਅਸਲੀ ਧਰਮ ਇਹੀ ਹੈ ਇਹੀ ਚੱਲਿਆ ਲੋਕਾਂ ਨੂੰ ਜਿਹੜਾ ਪ੍ਰਪੇਡਨ ਲਾ ਰਹੇ ਕਹਿ ਰਹੇ ਆ ਆਨੰਦ ਹੋ ਗਿਆ ਭਖਤਰ ਹੋ ਗਏ ਉਹ ਪੱਟਾਂ ਤੋਂ ਬੋਲ ਲਈ ਹੈ ਸਰ ਪੱਟਾਂ ਨਹੀਂ ਬੋਲ ਲਈ ਹੈ ਵੀ ਬਿਲਕੁਲ ਸਾਡੇ ਬਜ਼ੁਰਗ ਗੋਵੇ ਰਹੇ ਨੇ ਇਹ ਗੱਲ ਹੈ ਉਹ ਇਹ ਲੋਕ ਝੂਠ ਬੋਲਦੇ ਨੇ ਇਹ ਪੱਟਾ ਦੇ ਪੱਟਾ ਸਾਡ ਤੋਂ ਬਰਾਬਰ ਨੇ ਪੱਟਾ ਦੇ ਮੁਹਰ ਲਾਤੀ ਤੇ ਬੜੀ ਪ੍ਰੋਬਲਮ ਆਉਂਦੀ ਲੋਕਾਂ ਨੂੰ ਇਹਦੀ ਪੱਟਾਂ ਦੀ ਅੱਛਾ ਜੀ ਲੋਕ ਸਰਦਾਰ ਰੱਖਦੇ ਸੀ ਬਈ ਦੇ ਪੁੱਛਣ ਕਿ ਬੋਲਦੇ ਸੀ ਲੋਕ ਜਾਨਵਾਨ ਨੇ ਇਹਨਾ ਪੱਟਾ ਦਾ ਰੌਣਕ ਵਾਸਤੇ ਨਾ ਅਰੰਭ ਉਹ ਬਾਰਾਂ ਰਕੀਓ ਫਿਰ ਪੱਟਾ ਦੇ ਨੋਤੇ ਅੱਛਾ ਕਿਸੇ ਦੇ ਪਾਈ ਗੁਰ ਦਾ ਹੱਦ ਨੋਤੇ ਪੱਟਾ ਦੀ ਉਹ ਵੀ ਪੱਟ ਦੀ ਇਹਦਾ ਕੀ ਕਿਸੇ ਵੀ ਬਾਹਰ ਪੱਟੇ ਗਲਦੇ ਹੋਏ ਸੀ ਹਮ ਹਮ ਕੁਰਬਾਨੀ ਦਾ ਜਨਾਜ਼ਾ ਵੇਲੇ ਕੋਈ ਦੀ ਬਿਲਕੁਲ ਵੀ ਨਾ ਕੋਈ ਰਾਗ ਆਇਆ ਨਾ ਕੋਈ ਲੋਅ ਆਇਆ ਨਾ ਲਾਇਆ ਨਾ ਦੇਣ ਨਾ ਕੋਈ ਜੀ ਸ਼ਲੋਕ ਹੈ ਕੁਛ ਵਧੀਆ ਹੈ ਉਹ ਤਾਂ ਆ ਰਿਹਾ ਹੈ ਇਹਨੂੰ ਹਿੱਟ ਕਰਦੀ ਹੈ ਸਭ ਕਾਸੇ ਨੂੰ ਤੇ ਰਾਜ ਯੋਗ ਮਾਣਿਓ ਇਹਦਾ ਕੀ ਭਾਵ ਹੈ ਜੀ ਰਾਜ ਯੋਗ ਮਾਣਿਓ ਅਸਲ ਦੇ ਉਹ ਹੀ ਕੱਤਲਪਤੀ ਆਜਾ ਜਿਹੜਾ ਪਹਿਲਾਂ ਤੇ ਅੱਛਾ ਜੀ ਨਾਨਕ ਦੀ ਗੱਲ ਕਰ ਰਹੇ ਹਨ ਜੀ ਆ ਜੋਗ ਹੈ ਐਸਾ ਜੋਗ ਹੈ ਹੂੰ ਹੂੰ ਤਾਂ ਇੱਕੋ ਐਸੀ ਹੋਈ ਹੈ ਕਿ ਰਾਜਾ ਹੈ ਹੂੰ ਹੂੰ ਤੋ ਕਿ ਨਰਪਤ ਇਹ ਤੁਸੋਂ ਹਾਸਲ ਹੋਇਆ ਸੁਪਨੇ ਤੇ ਆ ਪਖਾੜੀ ਹੂੰ ਹੂੰ ਹਾਸਲ ਤੇ ਸੱਚਖੰਡ ਸਾਰੇ ਬੈਠੇ ਤੇ ਸੁਪਨੇ ਦੇ ਸੰਸਾਰ ਚ ਨੇ ਹੂੰ ਹੂੰ ਸੰਸਾਰ ਚ ਕੇਵਲ ਸੁਪਨਾ ਦੇਖਣ ਆਏ ਹੋਏ ਨੇ ਹੂੰ ਹੂੰ ਸੁਪਨੇ ਆ શરીર ਸੰਸਾਰ ਚ ਹੈ ਸੋ ਜੀ ਸਾਚਖੰਡ ਜੀ ਸਭ ਦਾ ਇਸ ਕਰਕੇ ਅੱਤਾ ਜਿਹੜਾ ਹੈਗਾ ਇਹ ਦਲਾ ਸੱਚਖੰਡ ਜੀ ਬੈਠਾ ਸਾਡਾ ਸੱਚਖੰਡ ਦਾ ਇਸ ਹੈ ਹਮਮ ਜੇ ਸੋ ਜਿਹੜੀ ਆ ਸੰਸਾਰ ਹੈ ਛੁਲੀ ਸੰਸਾਰ ਹੁੰਦਾ ਤੇ ਜੇ ਆਮ ਆਦਮੀ ਨੂੰ ਸਮਝਾਉਣਾ ਹੋਵੇ ਤਿਰਕੁਟੀ ਔਰ ਹਿਰਦੇ ਦਾ ਅੰਤਰ ਉਹ ਕਿਵੇਂ ਆਪਾਂ ਸਮਝਾ ਸਕਦੇ ਆ ਬਾਗੇ ਸਿਰਕੁਟੀ ਹੈ ਹਾਂਜੀ ਦਿਮਾਗ ਜਿਹੜਾ ਹੈਗਾ ਤਿਰਕੁਟੀ ਹੈ ਅੱਛਾ ਜੀ ਦਿਮਾਗ ਦੇ ਵਿੱਚ ਜਿਹੜਾ ਤੀਸਰਾ ਕੱਲ ਕਹਿੰਦਾ ਜੇ ਤਾਂ ਸਮਾਧੀ ਲਾਉਂਦੇ ਨੇ ਜਿਹੜਾ ਪ੍ਰਚਾਰ ਕਰਦੇ ਨੇ ਜਿਹੜਾ ਪ੍ਰਚਾਰ ਇੱਥੇ ਹੋਇਆ ਤੁਹਾਡੇ ਹੂੰ ਕੀ ਆ ਰਹੀ ਤੇ ਹੂੰ ਉਹ ਹੈ ਅੱਛਾ ਜੀ ਖੋਜ ਦਿਲ ਹਰ ਰੋਜ ਠੀਕ ਹੈ ਜੀ ਪਰ ਹੁਣ ਦਿਲ ਨੂੰ ਤੁਸੀਂ ਕੀ ਕਹਿ ਰਹੇ ਹੋ ਕਿ ਇੱਕ ਮਾਈਂਡ ਹੈ ਇੱਕ ਹਾਰਟ ਹੈ ਇਹ ਦੋ ਆਰਗਨਸ ਦੀ ਗੱਲ ਹੋ ਰਹੀ ਹੈ ਜਿਹੜਾ ਹੈਗਾ ਉਹ ਵੀ ਚੇਤਨਾ ਹੈ ਜਿਹੜਾ ਹਾਰਟ ਉਹ ਅਸਲ ਵਿੱਚ ਬਣੇ ਹਾਰਟ ਹੈ ਸਾਲਾ ਮਨ ਆਪਣੇ ਆਪ ਹੀ ਹਾਰਟ ਹੈ ਮਨ ਟੋਲਦਾ ਹੈ ਦਿਮਾਗ ਦੇ ਵਿੱਚ ਬੈਠ ਕੇ ਸੰਸਾਰ ਚੋਂ ਅੱਛਾ ਜੀ ਮਨ ਨੇ ਆਪਣੇ ਆਪ ਨੂੰ ਰੋਲ ਹੁੰਦੀ ਹਮ ਮਨੇ ਦੇ ਦੁਆਲੇ ਆਪਣੇ ਅੰਦਰੋਂ ਕੋੜ ਦਾ ਭਾਰ ਹੋ ਮਾਟੋਲਾ ਤੇ ਪਰਪਲ ਆਈ ਸਭ ਕੁਝ ਘਰ ਵਿੱਚ ਬਾਹਰ ਨਾਲੀ ਮਨੋ ਕਹਿਉ ਆਪਣੇ ਅੰਦਰ ਚਾਹ ਅਗਰੇ ਅੰਦਰ ਹੈ ਬਾਹਰ ਝੂਠ ਖੰਡਾ ਅੱਛਾ ਜੀ ਬਾਹਰ ਹੈ ਅੰਦਰ ਮਨ ਵਿੱਚ ਆਪ ਬੰਦੇ ਵਿੱਚੋਂ ਆਪ ਹੈ ਮਨ ਵਿੱਚ ਆਪ ਉਹ ਆਪਣੇ ਮਨ ਮਨ ਦੇ ਅੰਦਰ ਮਨੁਆਸੀ ਦਿਲ ਕਹਿੰਦੇ ਜਿਹੜਾ ਸੂਖੀ ਸਰੀਰ ਹੈ ਸੂਖਸ਼ਮ ਸਰੀਰ ਦਾ ਜਿਹੜਾ ਅੰਦਲ ਹੈ ਉਹ ਵੀ ਮਨ ਹੈ ਪ੍ਰਤਵਾ ਮਨ ਹੈ ਜਿਹੜਾ ਚੁੱਧ ਦੇ ਅੱਛਾ ਜੀ ਚੁੱਧ ਮਨ ਹੈ ਜਿਹੜਾ ਹਮਮ ਜਿਹੜਾ ਬਾਹਰਲਾ ਝੂਠਾ ਇਹਨੇ ਮਰ ਜਾਣਾ ਅੱਛਾ ਅੰਦਰਲੇ ਸਰੀਰ ਦਾ ਜਿਹਨੂੰ ਮਨ ਕਹਿੰਦੇ ਉਹ ਚਿੱਤ ਹੈ ਅਸਲ ਚ ਹਾਂ ਚਿੱਤ ਹੈ ਜਿਹੜਾ ਉਹਦੇ ਵਿੱਚ ਹੈ ਚਿੱਤ ਹਮ ਹਮ ਆਪੋ ਕਰਨਾ ਤੇਰੇ ਚਿੱਤ ਵਿੱਚ ਕੀ ਹੈ ਜਿੱਤ ਕੀ ਛਾ ਹਮ ਹਮ ਪੂਰਨ ਹੋਏ ਚਿੱਤ ਦੀ ਇੱਛਾ ਹਮ ਹਮ ਚਿੱਤ ਦੀ ਇੱਛਾ ਦਾ ਪੂਰਨ ਹੈ ਗੁਰਬਾਣੀ ਮਨਕੀ ਇੱਛਾ ਤਿਆਰ ਕਰ ਜਿੱਤ ਇੱਛਾ ਦੀ ਗੱਲ ਕਰੋ ਉਹ ਕਿਸ ਦੀ ਇੱਛਾ ਹੋਗੀ ਚਿੱਤ ਵਿੱਚ ਇੱਛਾ ਸੱਚ ਦੀ ਹੈ ਮਨ ਵਿੱਚ ਇੱਛਾ ਝੂਠ ਦੀ ਹੈ ਮਾਇਆ ਦੀ ਹੈ ਹਮ ਹਮ ਤਸੰ ਪਾਜਾ ਵਿਚਾਰਿਆ ਗੋਬਰੀ ਕਰੋ ਹਾਗਦੇ ਰੱਛਾ ਪੂਰਨ ਹੋਏ ਚਿੱਤ ਕੀ ਚੋ ਹੂੰ ਠੀਕ ਹੈ ਜੀ ਜਿਹੜੀ ਸ਼ੋਭਾ ਹੈ ਅਸਲੀ ਉਹ ਚਿੱਤ ਵਿੱਚ ਹੈ ਹੂੰ ਹੂੰ ਇਹ ਰੈਲ ਦੀ ਸਲੂਚਤਾ ਠੀਕ ਹੈ ਚਿੱਤ ਕੀ ਜਿਆਦਾ ਨੰਬਰ ਨਹੀਂ ਆਉਂਦਾ ਬੁਲਦੀ ਅੱਛਾ ਪੂਰੀਆਂ ਨਹੀਂ ਹੋ ਰਹੀਆਂ ਮਨ ਵਿੱਚ ਜਿਹੜੀ ਇੱਛਾ ਦਾ ਸੰਸਾਰ ਪੈਦਾ ਹੋ ਰਹੀ ਹੈ ਇਹ ਨਹੀਂ ਪੂਰੀਆਂ ਹੋ ਰਹੀਆਂ ਚਿੱਤ ਵਿੱਚ ਕਿਤਾ ਨੰਬਰੇ ਨਹੀਂ ਆ ਰਹੇ ठीक है उधर जम सर कहता है इस गलती है हम्म हम्म ठीक है जी गाव हैं जनकाद जुगती जुगेश्वर हर रस पूरण सर्व कला भाई कहे जनकाद गा रहे दे ए किनु गा रहे दे को गा <स्थित्थ> ਹੂੰ ਉਹ ਵੀ ਘਾਰ ਰਹੇ ਨੇ ਗਾਵਾਂ ਰੇ ਦੀ ਈਲ ਨੇ ਗਾਣਾ ਸ਼ੁਰੂ ਕਰ ਲਿਆ ਬਦਲੀ ਹੋਇਆ ਅਜ ਤੱਕ ਉਹ ਅੱਛਾ ਜੀ ਮੁਕਤ ਹੂੰ ਜੀਵਨ ਮੁਕਤ ਹੋ ਜੀਵਨ ਜੋਗਾ ਹੋ ਹੂੰ ਹੂੰ ਭਾ ਹਟ ਗਿਆ ਉਸ ਨੇ ਮਰ ਗਿਆ ਉਹ ਅੱਛਾ ਜਿਨਾ ਜਿਹੜਾ ਆਖਦਾ ਰਹੂਗਾ ਕਹਦਾ ਰਹੂਗਾ ਉਹ ਮੇਰੇ ਜਿਉਦਾ ਰਹੂਗਾ ਅੱਖਾਂ ਲਗੀਆਂ ਦਸਰੇ ਮਰ ਗਾਉਂ ਹੂੰ ਹੂੰ ਦਸਾਂ ਲਈ ਬਾਰੇ ਠੀਕ ਹੈ ਜੀ ਹਰ ਵੇਸਰਾ ਸਦਾ ਖੁਆਰੀ ਖੁਆਰੀ ਸ਼ੁਰੂ ਹੀਰੇ ਨੇ ਦੌੜਣਾ ਸ਼ੁਰੂ ਕੀਤਾ ਬਲ ਨਹੀਂ ਹੋ ਸਕਦਾ ਸੱਦੇ ਵੀ ਹੂੰ ਹੂੰ ਸਾਝਾ ਲੇ ਸਰੀਰ ਦਾ ਹੋਣਾ ਨਾ ਕੋਈ ਬਦਲਦੀ ਨਾ ਫਿਰ ਅੱਗੇ ਲੈ ਜਾਂਦਾ ਪਰੇ ਗੱਲ ਵਿਦਵਾਨਾਂ ਦੇ ਦਿਮਾਗ ਕੀ ਆਸਰ ਦੀ ਵਿਦਵਾਨਾਂ ਤੋਂ ਪਰੇ ਦੀ ਗੱਲ ਹੈ ਇਹਨਾਂ ਦੀ ਗੁੱਦੀ ਤੋਂ ਪਰੇ ਦੀ ਗੱਲ ਹੈ ਇਹ ਤੇ ਵਿਸ਼ਵਾਸ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਇੱਥੋਂ ਤਾਂ ਸ਼ਹਿਰ ਜਦੋਂ ਲੋਕ ਸਾਰੇ ਗੱਲ ਆ ਜੀ ਇੱਥੋਂ ਕੋਈ ਨਾ ਕੋਈ ਕਹਾਣੀ ਆ ਠੀਕ ਹੈ ਪੇਰੋਂ ਹਤਵਾਰ ਨਹੀਂ ਦੋਦੇ ਰਹਿ ਗਏ ਹਮਮ ਜਨਕਾਦ ਤੋਂ ਮਤਲਬ ਹੈ ਜਨਕ ਆਦ ਹੈ ਜੀ ਜਨ ਜਨ ਆਦ ਹੋ ਗਏ ਫਿਰ ਇਹ ਜਨਕ ਦਾ ਕਿੱਦਾਂ ਹੋ ਗਿਆ ਫਿਰ ਹਮ ਬਹੁਤ ਹੋ ਗਿਆ ਹਾਂ ਜਨਕ ਲਿਆ ਸਾਰੇ ਅੱਛਾ ਜੀ ਇਹਦਾ ਗੁਣ ਪਾਛ ਕਰ ਜਿਹੜਾ ਲੱਗਦਾ ਹੈ ਜਾਨ ਹਾਂ ਬਣਿਆ ਇਹ ਜੰਦਾਰ ਹੁੰਦਾ ਜਾਣਕਾਰ ਜਿਹਦੇ ਹੱਥ ਆਪਣੇ ਆਪ ਨੂੰ ਜਨ ਕਹਦੇ ਹੁੰਦੇ ਨੇ ਭਗਤ ਅੱਛਾ ਜੀ ਹਾਂਜੀ ਵੀ ਆਪਣੇ ਆਪ ਨੂੰ ਜਨ ਕਹੇ ਹੈ ਕਬੀਰ ਨੇ ਵੀ ਆਪਣੇ ਆਪ ਨੂੰ ਜਨ ਕਿਹਾ ਜਨ ਕਬੀਰ ਕੋ ਜੋ ਉਹਨਾਂ ਪਹੁੰਚੇ ਕਹਾ ਕਰੂ ਨਗਰ ਦੂਜਾ ਉਹਨੂੰ ਜਨ ਦੀ ਕਹਿਣ ਹੁੰਦਾ ਦੂਜਾ ਨੂੰ ਜਨ ਕਹੇਵਾ ਹੁੰਦਾ ਇਕੇ ਤਰ੍ਹਾਂ ਇਹ ਜਨ ਕਲਾ ਜਿਹੜਾ ਹੈਗਾ ਇਹ ਜਦਾ ਪ੍ਰਤੀਕ ਹੈ ਹੋਰ ਦੂਜਾ ਜਦ ਕਹੂ ਜਨਕ ਕਹੂਗਾ ਆਪਨੇ ਅਬਰੂ ਜਨ ਕਹੂਗਾ ਹੈ ਅੱਛਾ ਜੀ ਜਨਕ ਨੂੰ ਸੋਈ ਜਨ ਛਾਲਿਆ ਹੂੰ ਹੂੰ ਜਿਹੜੀ ਛਾਲ ਲਿਆ ਉਹ ਜਨਕ ਹੈ ਹੂੰ ਜੇ ਆਪਾਂ ਸਿੱਖ ਸਿੱਖ ਹਾਰ ਤੋਂ ਜਨ ਕੇ ਹੈ ਆਪਾਂ ਆਪਣੇ ਨੂੰ ਸਿੱਖੇ ਦਾਂਗੇ ਹੂੰ ਹੂੰ ਫਿਕਰ ਆ ਬੰਦੇ ਸਿੱਖਿਆ ਲੈ ਰਹੇ ਚਰਦਾਰ ਸਗੁਰੂ ਬਣ ਜਾਂਦਾ ਇਹ ਸਿੱਖਿਆ ਲੈ ਲਈ ਜੇ ਸਿੱਖਿਆ ਲੈ ਤੋ ਕੀ ਚਰਦਾਰ ਬਣ ਜਾਂਦਾ ਚਲ ਕਰ ਆਪਣੇ ਆਪ ਨੂੰ ਟੀਚਰ ਕਹ ਦੇਖੋ ਆਪਣੇ ਆਪ ਸੇ ਜਾਣਣਾ ਦੂਆ ਸਿੱਖਿਆ ਲਈ ਉਹਦਾ ਜਨ ਕਹਿ ਸਕਦਾ ਆਪਣੇ ਆਪ ਨੂੰ ਟੀਚਰ ਹੀ ਕਹ ਦੇ ਜਿਵੇਂ ਭਗਤ ਆਪਣੇ ਆਪ ਨੂੰ ਭਗਤ ਕਹਿੰਦੇ ਭਗਤਾਂ ਨੂੰ ਗੁਰੂ ਆਪਣੇ ਗੁਰੂ ਸਾਹਿਬਾਂ ਨੇ ਭਗਤ ਕਿਹਾ ਉਹਨਾਂ ਨੇ ਤਾਂ ਨਹੀਂ ਆਪਣੇ ਆਪ ਨੂੰ ਭਗਤ ਕਹਾਇਆ ਹਾਂ ਆਪਣੇ ਆਪ ਨੂੰ ਭਗਤ ਨੂੰ ਭਗਤ ਠੀਕ ਹੈ ਜੀ ਜੁਗ ਜੁਗਤੀ ਜੁਗੇਸ਼ਰ ਕਾਹ ਜੁਗਤੀ ਜੁਗੇਸ਼ਰ ਆਪਣੇ ਨਰਦਨਾਲ ਜਿਵੇਂ ਜੁਗਤੀ ਨਾਲ ਉਹਨਾਂ ਦੀ ਜੁਗਤੀ ਦੀ ਜੁਗਤੀ ਜਿਵੇਂ ਜਿਵੇਂ ਠੀਕ ਹੈ ਜੀ ਹਰ ਰਸ ਪੂਰਨ ਸਰਵ ਕਲਾ ਜੋਗੇਸ਼ਰ ਜੋਗੀ ਜਿਹੜੇ ਜੋਗੀ ਨੇ ਉਹ ਵੀ ਖੋਦੇ ਰਹੇ ਨੇ ਜੋਗੇਸ਼ਰ ਹੋਰ ਨੇ ਅੱਛਾ ਜੀ ਜ਼ੁਗਤੀ ਜੋਗੇਸ਼ਰ ਜੋਗੇਸ਼ਰ ਵੀ ਦੋਵੇਂ ਨੇ ਜ਼ੁਗਤੀ ਦਾ ਮਤਲਬ ਹੋਵੇਗਾ ਭੁਲੇਖਾ ਜੋ ਗੁਰਬਾਣੀ ਪੜ੍ਹਦੇ ਦਾ ਲੋਕ ਗੁਰਬਾਣੀਆਂ ਦੇ ਠੀਕ ਹੈ ਜੀ ਹੁਣ ਵੀ ਸਾਡੇ ਵੀ ਹਾਂ ਜੀ ਇਹ ਜ਼ੁਗਤੀ ਅਲੱਗ ਅੱਖਰ ਹੈ ਜੀ ਜ਼ੁਗਤੀ ਜੋਗੇਸ਼ਰ ਕੇ ਇੱਕ ਹੀ ਇਹ ਦੋਹੇ गाव में जनकराज जोगेश्वर आता है जोगेश्वर अलग से जोगेश्वर गांव दे रहा है अपनी दुक्ति के नाल कि उन्होंने दी योग्यता है अच्छा जी उसी तरह गांव ने हर रस पूरण सर्व कला ठीक है जी हां ਆਨਕਤੋ ਪੂਰਾ ਕਰਨ ਵਾਲਾ ਵੀ ਹੈ ਹਮ ਹਮ ਆਪ ਦਾ ਪੂਰਾ ਪੂਰਾ ਕਰਨ ਵਾਲਾ ਵੀ ਹੈ ਹਮ ਹਮ ਹਾਂਜੀ ਗਾਵ ਹੈ ਸੰਕਾਦ ਸਾਧ ਸਿਧਾदिक मुनि जन गावहै अचल छला ਹਾਂਜੀ ਸਰਬਖਲਾ ਦਾ ਮਤਲਬ ਹੈ ਜਿਹੜੀ ਬੇਬੇਖਬੁੱਦੀਆ ਅੱਛਾ ਜੀ ਉਹ ਸਤਿ ਵੀ ਹੁੰਦਾ ਹੂੰ ਹੂੰ ਇਹ ਲੋਕਾਂ ਤੋਂ ਪਰੇ ਦਾ ਗਿਆਨ ਵੀ ਹੁੰਦਾ ਹੈ ਉਹ ਬੇ ਗੁੱਦੀ ਚ ਹੂੰ ਹੂੰ ਬੇ ਗੁੱਦੀ ਤੇ ਲੋਕਾਂ ਦਾ ਗਿਆਨ ਤਾਂ ਹੁੰਦਾ ਜਿਹੜਾ ਉਹ ਤੋਂ ਪਰੇ ਦਾ ਵੀ ਹੁੰਦਾ ਨੂੰ ਸਰਬ ਕਲਾਏ ਸੇ ਨੂੰ ਨੂੰ ਠੀਕ ਕਲਾ ਸੁਭਰਾ ਸਿਤਾ ਹੀ ਕੇ ਹੋਇਆ ਹੂੰ ਕਲਾ ਜਿਹੜਾ ਹੈ ਸਰਬ ਕਲਾ ਗੁੱਦਾ ਉਹੀ ਸਮਰਥ ਗੁੱਦਾ ਹੈ ਆਹ ਆ ਗੁਰੂ ਸਬਦ ਅਰਥ ਹੈ ਆ ਉਹਦੀ ਬੁੱਧ ਸਬਦ ਅਰਥ ਹੈ ਸਬਦ ਅਰਥ ਗੁਰੂ ਸਿਰ ਹੱਥ ਧਰਿਓ ਹਾਂਜੀ ਗਾਵਹਿ ਜਨ ਕਾ ਕਾਦ ਸਾਧ ਸਿਧਾ ਮੁਨੀ ਜਨ ਗਾਵਹਿ ਅਚਲ ਛਲਾ ਆਹ ਸਾਧ ਸਿਧ ਆਦਤ ਹਾਂ ਸਾਧਨਾ ਕਰਨ ਵਾਲੇ ਔਰ ਜਿਹੜੇ ਸਾਧਨਾ ਕਰ ਲਈ ਸਿਧ ਹੋ ਗਏ ਉਹ ਵੀ ਗਾ ਰਹੇ ਉਪੀ ਗੋਡੇ ਦੇ ਹੈ ਜਿਹੜੀ ਜਿਹੜੇ ਹੈਗੇ ਨੇ ਹਾਜ਼ਰ ਹੋ ਗਾ ਰਹੇ ਨੇ ਹੂੰ ਹੂੰ ਉਪੀ ਗੋਡੇ ਦੇ ਹੂੰ ਹੂੰ ਹਾਂਜੀ ਅਮ ਮਨੀ ਜੰਨ ਗਾਮ ਹੈ ਅਛਲ ਛਲਾ ਮਨੀ ਜੰਨ ਇਸ ਸਰਪੇ ਗਾ ਰਹੇ ਨੇ ਅਛਲ ਹੂੰ ਹੂੰ ਅਛਲ ਮੈਂ ਕਿਹਾ ਰਹੇ ਹੈ ਅਛਲ ਅੱਛਾ ਜੀ ਆਪਣੇ ਆਪ ਚੱਲ ਘੱਟ ਸਪੋਰਟ ਕਰਦੇ ਨੇ ਪਰ ਉਹਨਾਂ ਨੂੰ ਛੱਲ ਬੁਲਦੇ ਨੇ ਆਪਣੇ ਆਪ ਨੂੰ ਛੱਲ ਬੁਲਦੇ ਨੇ ਲੋਕਾਂ ਨੂੰ ਛੱਲ ਕਹਿੰਦੇ ਨੇ ਅੱਛਾ ਜੀ ਉਹ ਐਨੰਨਾ ਹੋਰ ਛੜੀ ਆ ਹੂੰ ਛੋਟਾ ਘੜੀਆ ਸਭ ਨੂੰ ਛੱਡ ਲੈਂਦਾ ਪਰ ਉਹਨੂੰ ਨਹੀਂ ਛੱਡ ਸਕਦਾ ਕਿਉਂਕਿ ਅਸੀਂ ਗੁਰੂਆ ਅਸੀਂ ਸੰਸਾਰ ਨੂੰ ਛੱਡ ਸਕਦੇ ਆ ਅਸੀਂ ਵੀ ਤਾਂ ਉਹਦੇ ਵਰਗੇ ਹੀ ਹੂੰ ਹੂੰ ਛੱਡ ਘੜਤੀ ਛੁੱਟ ਲੈ ਲਈ ਤੇ ਪਰ ਮੈਂ ਕਿਹੜਾ ਛੱਡ ਸਕਦਾ ਵੱਡਾ ਅਸੀਂ ਵੀ ਵੱਡੇ ਵੀ ਛੱਡ ਕਰ ਸਕਦੇ ਹੂੰ ਹੂੰ ਛੱਡ ਘੜਤੀ ਛੁੱਟ ਲੈ ਲਿਆ ਗੱਲ ਕਹ ਕੇ ਹੂੰ ਹੂੰ ਅਰੇ ਜਦੋਂ ਕੀਤਾ ਹੂੰ ਕ੍ਰਿਸ਼ਨ ਨੇ ਉਹਦਾ ਨਾਂ ਕਪੜਾ ਜਿਹੜਾ ਹੈਗਾ ਬਰਬਰੀ ਉਹਦਾਂ ਛਲ ਕੀਤਾ ਇਹਦਾ ਪੰਡੂ ਦਾ ਵੱਡਾ ਭਰਾ ਹੈ ਕਹਿੰਦਾ ਉਹਦਾਂ ਛਲ ਕੀਤਾ ਰਿਸ਼ਤੇ ਮਾਸ਼ ਨਾ ਕੀਤਾ ਹੋਵੇ ਤੇ ਪੰਡਤ ਨੇ ਜਰੂਰ ਦੇ ਦਿੱਤਾ ਤੇ ਗੁੱਛ ਲਈਆ ਅੱਛਾ ਕ੍ਰਿਸ਼ਨ ਲੱਗਦਾ ਹਮਮ ਅਸਲ ਵਿੱਚ ਉਹ ਨਾਮ ਵਰਤ ਕੇ ਗੱਲ ਕਰਦਾ ਨੇੜੇ ਖੜਾ ਹਮਮ ਅਣ ਉਹ ਨਾਮ ਕਰਦਾ ਬੁਝੂ ਵੀ ਹਮਮ ਮੈਨੂੰ ਨਹੀਂ ਲੱਗਦਾ ਕਿ ਹਿਸ ਹੋਵੇ ਹਮਮ ਜਿਸ ਵਾਰ ਦੇਖਣਾ ਉਹ ਰਾਮ ਕਲਵਾ ਹਾਸੇ ਬਣ ਤਨੇ ਸੀ ਹਮਮ ਸਿੱਧਾ ਖਿਲਾਫ ਕਰਨੇ ਚੁੱਤੇ ਜਦੋਂ ਉਹ ਗਰਾ ਪੜਦੇ ਨਾ ਸਿੱਧਾ ਖਿਲਾਫ ਹੈ ਕ੍ਰਿਸ਼ਨ ਬਣ ਗਾ ਜਬਾਗਰ ਉਹ ਤਾਂ ਕੋਈ ਬਾਗ ਨੂੰ ਬੋਲਦਾ ਹੀ ਨਹੀਂ ਜੀ ਜਸਪਤ ਹੂੰ ਹੂੰ ਜੀ ਨੂੰ ਕਿੱਥੇ ਬੁੱਧੀ ਹੈ ਅੱਛਾ ਜੀ ਕੇ ਪੁਲਪਾਪ ਨੂੰ ਘੋਲਦਾ ਪੜ੍ਹਨਾ ਤਾਂ ਹੂੰ ਬਹੁਤ ਜਿਲਾ ਕਿਹੜਾ ਕਿਸਮਾ ਬੋਧਨਾਪ ਕਰਨਾ ਬਹੁਤ ਮੁਸ਼ਕਿਲ ਹੈ ਤੇ ਬਾਦੇ ਜਾਂ ਪੜ੍ਹ ਲਾ ਲਿਖਿਆ ਜੋ ਉਹ ਲਿਖੇ ਠੀਕ ਹੈ ਕੋਈ ਜੀਤਾ ਕ੍ਰਿਸ਼ਨ ਦੀ ਨਹੀਂ ਲਿਖੀ ਇਹ ਤਾਂ ਗਲਤ ਹੈ ਹਾਂ ਪੜ੍ਹਨ ਦੇ ਨਹੀਂ ਹੋਊਗੀ ਹੂੰ ਪਾਇਆ ਹੋਊਗਾ ਜੀਤਾ ਕ੍ਰਿਸ਼ਨ ਨੇ ਉਸਾਰੀ ਵੀ ਹੈ ਉਹਨੇ ਉਹਦੇ ਜਵਾਨੀ ਦੇ ਦਿੱਤਾ ਹੋਊਗਾ। ਉਹ ਤਾਂ ਵਕੀਲਾ ਲਖਬੁਰੀ ਵੇ ਗਏ ਉਹਦੇ ਵਿੱਚ। ਹਾਂਜੀ। ਚੱਕਦੇ ਬਜ਼ਾਰਕ। ਹੂੰ ਹੂੰ। ਜਵਾਨੀ ਉਹਦੇ ਦਿੱਤਾ ਹੋਊ ਭਾਈ ਵੇਜ਼ੇ ਕਹਿੰਦਾ ਵੇਦ ਦੇ ਆਧਾਰ ਗੀਤਾ ਕਹਿੰਦੀ ਉਹ ਵੀ ਕੁਰਬਾਨੀ ਕਰੀ ਹੈ। ਠੀਕ ਹੈ। ਯਾਦੂ ਆਵਰੇ ਮਰਜ਼ੀ ਦੀ। ਹੂੰ ਹੂੰ। ਦੂਸਰ ਕਹਿਣਾ ਉਹਨਾਂ ਬਾਪ। ਆ ਜੋ ਸਿਮਰ ਦਸ਼ਾ ਹੈ ਨਾ ਸ਼ਾਹ ਤੇ ਬਿਲਕੁਲ ਖਰਾਸ ਜੀਤਾ ਹੂੰ ਹੂੰ ਤਾਂ ਕਿ ਇਹਨਾਂ ਨੂੰ ਦੋਹਾਂ ਨੂੰ ਰੋਣਾ ਸੀ ਠੀਕ ਹੈ ਜੀ ਬਿਰੋ ਪਾਸ ਬਿਠਾਉਣ ਦੀ ਦਾ ਵੀ ਬਿਟਾਰਤਾ ਉਹਦਾ ਵੀ ਬਿਟਾਰਤਾ ਹੂੰ ਹੂੰ ਉਹਦੀ ਹੁਸ਼ਿਆਰੀ ਹੈ ਸਾਡੇ ਅਰਥ ਕਾਲ ਵੇਲੇ ਵੀ ਪੜਨ ਦੀ ਕਲਮ ਦੀ ਹੁਸ਼ਿਆਰੀ ਹੈ ਉਹ ਕੀ ਹੈ ਹੂੰ ਵਾਲਿਆਂ ਨੇ ਨਹੀਂ ਭੜੀ ਹੂੰ ਹੂੰ ਆਇਆ ਅਭੀ ਭਰ ਲਈ